ਪਰ ਉਹ ਕੀ ਆ ਗਿਆ ਆਤਮ ਹਿਤਾਵਾ ਜੀਵਨ ਮੁਕਤ ਸੋਹ ਕਹਾਵਾ ਪਰ ਕੀ ਆ ਆਤਮ ਹਿਤਾਵਾ ਜਿਹੜਾ ਅਧਿਨੇ ਮਨੋਰੰਤਰ ਬਿਲਕੁਲ ਪਰ ਉਹ ਕੀ ਆ ਗਿਆ ਇਹ ਕੋਣਾ ਬੇਰੇ ਹੇਤ ਵਿੱਚ ਚਾਹੇ ਪੜਨਾ ਕੁਝ ਵੀ ਹੈ ਚਾਹੇ ਤਿੱਤੀ ਤਵੀਤੇ ਬੈਠਣਾ ਹੈ ਪਰ ਬੇਰੇ ਵਾਸਤੇ ਚੱਗਾ ਹਮਾਰਾ ਜੋ ਜਸਤੀ ਤਵੀ ਤੇ ਬੈਠਾ ਤੇ ਮਿਲਿਆ ਮੇਰੇ ਨਾ ਬੈਠਾ ਉਹਨਾਂ ਫਿਰ ਨਹੀਂ ਮਿਲਦਾ ਅੱਜ ਤੋ ਜਸਾ ਪੰਜ ਪਾਸ਼ਾ ਦਾ ਉਸ ਤਵੀ ਤੇ ਬੈਠਾ ਕਰਕੇ ਮਾਇਆ ਉਹ ਦਸ ਦੁਨੀਆਂ ਕਿੰਨੇ ਸ਼੍ਰੀਮਾਨ ਹੋਣਗੇ ਕਿ ਨਾਲ ਹੀ ਗਰੇਨਾਂ ਨੇ ਦੁਨੀਆਂ ਜੀ ਕਰਦੀ ਐ ਕਿਉਂ ਉਹ ਨਾਨਕ ਦਾ ਨੂੰ ਜਾਣਦਾ ਹੈ ਆਹੜਾ ਉਹ ਯਾਰ ਜੀ ਸੰਤਲੋਕ ਪੁੱਛੇ ਕੀ ਡੀਗਰੀ ਦੇ ਰਹੇ ਨੇ ਹਾਂ ਤੇ ਤੁਹਾਨੂੰ ਸ੍ਰੀ ਛੱਟਿਆ ਕਿਸ ਨੂੰ ਪਤਾ ਹਾਂ ਜਨਮ ਤਾਂ ਜ਼ਰੂਰ ਮਣਾਉਣਾ ਨਾ ਕੋਈ ਨਾਮ ਜੀ ਡੀਗਰੀ ਤੇ ਬਿਆਨੇ ਛੋਟੇ ਜਵਾਬ ਵੀ ਕੋਈ ਨਾਮ ਦਾ ਤਾਂ ਪਤਾ ਸੀ ਸਮਝਦੇ ਸੀ ਉਹ ਤਾਂ ਇਹ ਗੱਲ ਇਸ ਚਰਕੇ ਬਾਣ ਮਿੱਠਾ ਲੱਗੇ। ਜਪੀ ਚਬੀ ਤੇ ਬੈਠ ਤੇਰਾ ਬਾਣ ਮਿੱਠਾ ਲੱਗਦਾ। ਆਹੀ ਗੱਲ ਆਈ ਲਿਖੀ ਹੋਈ ਸੀ। ਉਹਲੇ ਕੋਈ ਵੀ ਹੋਂ ਵੀ ਬਾਣ ਮਿੱਠਾ ਲੱਗਦਾ ਕਦਾਂ ਹਾਂ ਮਿੱਠਾ ਲੱਗਦਾ। ਪੰਕਤੀ ਕਰਕੇ ਤੇ ਜੀ ਤੇ ਬੈਠਣ ਤੇ ਆਤਮਾ ਕਹਦਾ ਰੱਬ ਦੀ ਅਗਿਆਤਮਾ ਕਹਦਾ। ਇਹ ਕਾਰਨ ਦੀ ਭਕਤੀਆ ਅਸੀਂ ਕਦੇ ਕਦੇ ਹੁਰਦੀ ਮਠਾ ਲੱਗਦਾ ਬਨਾਂ ਮਠਾ ਲੱਗਦਾ ਲੱਗਦਾ ਹੀ ਸੀ ਕਿ ਹੁਰਦੀ ਹੀ ਹੋ ਰਿਹਾ ਚਲੋ ਨੰਨ ਤੋਂ ਬੈਠਣਾ ਬੰਦ ਕਰ ਚੁਕੋ ਤੁਹਾਡਾ ਪੱਕਾ ਐਂਡ ਆ ਗਿਆ ਕਿ ਕੁਝ ਵੀ ਧਿਆਨ ਦੇ ਧਿਆਨ ਭਾਣਾ ਆਪਣੇ ਵਾਸਤੇ ਹੋ ਸਾਡੇ ਹਿੱਤ ਚ ਉਹ ਸਾਡੇ ਹਿੱਤ ਚ ਉਹ ਤਾਂ ਫੜਨ ਗੱਲ ਸੁਣ ਸੀ ਸਭ ਨੂੰ ਜੋ ਤੱਕ ਵੈਲੋ ਪੈਦਾ ਹੀ ਚੜ ਕੇ ਮਾਦਾ ਦੇ ਹੱਥ ਵਿੱਚ ਸੀ ਉਹ ਪਾਹ ਦੇ ਹੱਥ ਵਿੱਚ ਜਹਾ ਮਾਦੇ ਕਿਤੇ ਪਹੁੰਚ ਗਏ ਜੜੀ ਵਸਾਂ ਰਿਆਈ ਨੂੰ ਪਹੁੰਚ ਗਏ ਉਹਦੇ ਬਾਅਦ ਸਾਰਾ ਪਰਿਵਾਰ ਹੀ ਗਰੂਹ ਤੋ ਤੱਕੜੀ ਦਾ ਪਾਛਾ ਤੱਕ ਉਹਦੇ ਪਰਿਵਾਰ ਆਪੇ ਹੀ ਪਰਿਵਾਰ ਹੀ ਉਹਨਾਂ ਦਾ ਜੋ ਜੀ ਪਰਿਵਾਰ ਕਰਵਾ ਰਿਹਾ ਪਰਵਾਹ ਸਾਹਿਬ ਦੀ ਪਰਵਾਹ ਰਿਹਾ ਤੇ ਭੱਜੂ ਪਰਵਾਹ ਸਾਹਿਬ ਦੇ ਸੇਵੇਂ ਦੋਹਾਟ ਆ ਰਿਹਾ 58 ਸਤੋਂ ਸਭ ਉਹਨਾਂ ਦੇ ਪਰਵਾਹ ਜੀ ਜਿੰਨਾ ਦਾ ਛੋਟੀ ਦਾ ਗਲਤ ਗੱਲ ਕੀ ਹੈ ਇਹ ਤਾਂ ਕਹਾਂ ਦੀ ਗੱਲ ਹੈ ਆਤਮ ਦਾ ਵਾਗਾ ਜੋ ਕੋਦਾ ਕਿੰਨੀ ਗੁਲਾਮ ਦਾ ਰੋਤਾਂ ਦਾ ਆਧਾਰ ਕਰਤਾ ਆਪਣਾ ਨਾ ਹੋਇਆ ਹੀ ਹੋਇਆ ਆਤਮ ਹਤਾਵ ਜੀਵਨ ਮੁਕਤ ਸੋਕਵਾ ਹੈ ਜੀਵਨ ਮੁਕਤ ਹੋਰ ਜੀਵਨ ਹੈ ਕਿ ਪ੍ਰਾਪਤੀ ਆ ਗਿਆ ਰੂਹ ਆਤਮ ਹ ਵਿੱਚ ਮਹਾਂਤ ਜੀਵਨ ਮੁਕਤ ਹੈ ਉਹ ਜੀਵਨ ਮੁਕਤ ਚਾ ਉੱਤੇ ਪਾਜਾ ਦੇ 2 ਦਸਤ ਪਾਜਾ ਦੇ ਸਿੰਧਸਾਰੇ ਜੀ ਲੋਵ ਵਿੱਚ ਉਹ ਆਉਂਦੇ ਗਏ ਦੋਇ ਸੱਜਦੇ ਸੀ ਲੋਗ ਸਾਹਮਣੇ ਜੀ ਲੋਏ ਨਾ ਤਾਂ ਫੇਰ ਉਹ ਕੀ ਕਹਿਣਾ ਤੋਦ ਬਿਨਾਂ ਰੋਗ ਵਜਾਇਆ ਦਾ ਹੌਟਣ ਜੇ ਨਾ ਹੁਕਮ ਤੇ ਪਾਣ ਤੇ ਮਮਰ ਦਾ ਮਿਠਾ ਲੇ ਛੱਡ ਕੇ ਚੱਲਦਾ ਪਾਣੇ ਨੂੰ ਇੱਕ ਵਿੱਚ ਨਾਮਨ ਅੱਗੇ ਚੱਲਦਾ ਰੋਗ ਸੀ ਹੋ ਤੋ ਗੁਰ ਰੋਜ਼ੀਓ ਜੰਗਣਾ ਦਾ ਉਤੋਂ ਸੋਖੀ ਪਾਲਾ ਠੰਡਾ ਹੱਦ ਤੱਕ ਨਾ ਕੋਈ ਕਪੜਾ ਕੋੜ ਨਹੀਂ ਹੈ ਬੀਤੇ ਆ ਗਿਆ ਪਹਿਲਾਂ ਮੇਰ ਬਾਅਦ ਨੇ ਹਾਂ ਮੇਰ ਬਾਅਦ ਨੇ ਕੋਈ ਬਜ ਨਹੀਂ ਤੋਦ ਛੱਡ ਕੇ ਚੱਲਦਾ ਸੱਚ ਨੂੰ ਛੱਡ ਕੇ ਚੱਲਦਾ ਗੁਰਮਤਿ ਕਿਆ ਕਰਕੇ ਚੱਲਦਾ ਕੰਪਰੋਮਾਈਜ਼ ਕਰ ਲੈਂਦਾ ਜਿਵੇਂ ਉਹ ਕਹਿੰਦੇ ਸੀ ਉਹ ਰੋਗ ਸੀ ਗੁਰ ਉਹ ਸੁਖ ਰੋਗ ਸੀ ਗੇ ਰੋਗ ਰਜਾਇਣਾ ਰੋਗ ਸੁਖ ਨਾਗਨਵਾਸਾਂ ਦੇ ਉਹ ਨਾ ਉਸ ਜਿਹੜੇ ਆਸਿੱਤ ਸਭ ਪਾਈਟਾਰੀਏ ਸਾਰੇ ਮਨਾ ਦੇ ਨਰਵਰ ਸਭ ਨਾਲ ਰਹਿਣਾ ਸਭ ਦੇ ਦੁੱਖਾਂ ਤੋਂ ਨਾ ਉਹਨਾਂ ਨੇ ਵੀ ਇਹ ਗੱਲ ਕਹੀ ਵਨਾਈ ਵਹੀਕਲ ਇਸ ਇਹ ਘਟਨਾਵਾਂ ਨਿਗਰੂ ਕਰਦੇ ਕੋਈ ਗੁੱਡ ਜੋ ਲੈਕ ਸ ਵਿੱਚ ਸਾਨੂੰ ਗਏ ਸਾਡੇ ਕੋਲ ਸ਼ਬਦ ਹੈ ਆਪੀ ਸ਼ਬਦ ਹੈ ਉਹ ਮੇ ਦੇ ਵੀ ਇਹੀ ਗੱਲ ਹੈ ਰੱਬ ਆਗਿਆ ਆਤਮ ਨੇ ਜੇ ਹੈ ਜੀਵਨ ਮੁਕਤ ਹੋਊ ਕਹੋ ਫਿਰ ਜੀਵਨ ਮੁਕਤ ਦੋ ਪਾਰਟੀ ਇਹਨੂੰ ਬੁੱਤ ਚ ਬੀਤਣਾ ਪਾਣਾ ਬਿਠਾ ਕਰਕੇ ਬੰਨਣਾ ਜਿਹੜਾ ਹੈ ਨਾ ਉਹਦੇ ਨਾਲ ਛੱਡੀ ਉਸਤਾ ਛੱਡੀ ਵੱਡੀ ਅਵਸਥਾ ਉਹ ਕੱਲ ਛੋਟੀ ਕੀਆ ਪਾਣਾ ਬਣਾ ਦੇ ਤਾਂ ਅਵਸਥਾ ਤੇ ਇਹ ਤੋਂ ਵੱਡੀ ਅਵਸਥਾ ਹੀ ਕੋਈ ਨਹੀਂ ਹੈ ਪਾਣਾ ਦੇ ਮਿਠਾ ਲੱਗਣ ਲੱਗ ਗਏ ਇਹ ਤੋਂ ਵੱਡੀ ਅਵਸਥਾ ਹੀ ਨਹੀਂ ਰਹਿਣਾ ਕੋਈ ਸੌਲਡ ਪੜ੍ਹਨੇ ਬਨੇ ਹੋ ਉਹ ਕੋਸ਼ਿਸ਼ ਕੀਤਾ ਤੇ ਜੀਵਨ ਨੂੰ ਬੋਤਾ ਗੈਦਾ ਇਸ ਤੋਂ ਉੱਪਰ ਕੀ ਆ ਜੀਵਨ ਹਮਸਾ ਦਾ ਪਰ ਕੋਸਤਾ ਹੀ ਨਹੀਂ ਹਾਂਜੀ ਕੈਸਾ ਹਰਕ ਪੈਸਾ ਉਸ ਸੋਗ ਸਦਾ ਅਨੰਗ ਤੈ ਨਹੀਂ ਵਿਯੋਗ ਉਹਨੂੰ ਕਿਹਾ ਕੈਸਾ ਹਰਕ ਜੇ ਖੁਸ਼ੀ ਆਈ ਹੈ ਤਾਂ ਵੀ ਹੋ ਜੂਈ ਹੈ ਉਹ ਜੇ ਕੋਈ ਸੋਗ ਦਾ ਹੁਕਮ ਹੋਇਆ ਤਾਂ ਵੀ ਹੋ ਜਾਏਗਾ ਭੁੱਲੇ ਚਾਹੀਦਾ ਤਾਂ ਹੀ ਮਠਾਲ ਉੱਤ ਨਹੀਂ ਹਰਕ ਹਰਸ਼ ਹਰ ਸਲਾਮ ਰੱਬ ਦੀ ਦਾ ਸੰਤ ਰੱਬ ਦਾ ਕੋਲਾਸ ਖੁਸ਼ੀ ਵੈਰ ਵੈਰ ਵੀ ਇਸਨ ਬਲੈਨਸ ਖੁਸ਼ੀ ਨੂੰ ਲੈਣ ਤਸਾਉ ਸੋ ਸਦਾ ਨੰਤ ਨਹੀਂ ਵਿਯੋਗ ਸਦਾ ਆਨੰਦ ਦੀ ਵਰਸਾ ਕੰਦੀ ਰਹਿ ਸਕਦੀ ਹੈ ਕਿ ਖੁਸ਼ੀ ਔਰ ਗਮੀ ਦਾ ਅਸਰ ਨਾ ਹੋਵੇ ਇਹ ਗੱਲ ਜਿਸਨ ਉਜਿੰਦਰਾਵਤ ਕਰ ਦਿੱ ਗਿਆ ਕੁਝ ਨਾ ਵਿਆ ਹਾਰਟ ਅਟੈਕ ਹੋ ਜਾਂਦਾ ਨਵੀ ਨਵੀ ਹੋ ਜਾਂਦਾ ਤੋਂ ਉਹਨਾਂ ਹਾਰਟ ਅਟੈਕ ਹੁੰਦਾ ਹੈ ਦੋਈ ਬਿਮਾਰੀਆਂ ਨੇ ਬਿਮਾਰੀਆਂ ਦੋਈ ਹੋਈਆਂ ਜਿਹੜੇ ਜੀ ਇਹ ਹਾਰਟ ਅਟੈਕ ਹੁੰਦਾ ਤੁਸੀਂ ਉਹਨੂੰ ਕਿਵੇਂ ਕਹਿੰਦੇ ਹੋ ਰੋਗ ਨਹੀਂ ਹੈ ਸੁਖ ਰੋਗ ਹੈ ਨਾ ਰੋਗ ਤਾਂ ਬਣ ਕੇ ਪੈਕਟੀਕਲੀ ਰੋਗ ਹੈ ਜੀ। ਬੈਡ ਦੇ ਉੱਪਰ ਤੋਂ ਰੋਗ ਨਹੀਂ ਸੀ। ਬੈਡ ਦੇ ਉੱਪਰ ਤੋਂ ਰੋਗ ਪਰ ਤੋਂ ਰੋਗ ਨਹੀਂ ਉਸ ਹਸਪਤਾਲ ਜਾਂਦੇ ਅੰਮ੍ਰਿਤ ਤੈਸੀ ਉਹ ਖਾਦੀ। ਹੁਣ ਬਾਕੀ ਦਾ ਕੀ ਨਫਾ ਨੁਕਸਾਨ? ਇਹ ਨਫਾ ਨੁਕਸਾਨ ਹੋ ਗਿਆ। ਉਦੋਂ ਆ ਗਿਆ ਖੁਸ਼ੀ ਜਦੋਂ ਜਪਨ ਵਾਲਾ ਜਪਨ ਵਾਲਾ ਜਪਨ ਦੀ ਖੁਸ਼ੀ ਆ ਮਾਲ ਨਾਲ ਵਿੱਚ ਜੋਗ ਹੈ ਤੈਸਾ ਉਹ ਕਾ ਦਾਵਾ ਦਾ ਆ ਗਿਆ ਨਾ ਭਾਂਡੂ ਸਾਨ ਸੁਨਨ ਮਾਟੀਆ ਤੈਸਾ ਸੋਲਣਾ ਤੈਸਾ ਸਰ ਮਾਟੀ ਕੁ ਉਹ ਦੱਲਾ ਫੇਸਟਿਕ ਸਾਹਮਣੇ ਆ ਐ ਲਿਖਣਾ ਚਾਹਣਾ ਬਾਣੀ ਐਵੇਂ ਲਿਖੀ ਹੈ ਤਤੀਬ ਇਹ ਤਰਕੀਬ ਐ ਵਾਹਿੰਦੇ ਟੂ ਸਮਝਣ ਦੀ ਗੱਲ ਹੈ ਜੇ ਤਾਂ ਸੋਨਾ ਕੈਸੇ ਹੋਸੇ ਮੱਟੀ ਆ ਵੀ ਨਾ ਬਣ ਸਕਦਾ ਜੇ ਰੌ ਜੇ ਮਿੱਟੀ ਹੋਗੀ ਸੋਨੇ ਦੀ ਕਦੇ ਕੋਈ ਗੱਲ ਨਹੀਂ ਸੋਨੇ ਮਿੱਟੀ ਦਾ ਸੋਨਾ ਹੋਵੇ ਤਾਂ ਵੀ ਕੋਈ ਬਣਦਾ ਨਹੀਂ ਪ੍ਰੋਪਰਟੀਜ਼ ਹੋਣਾ ਵੀ ਤਾਂ ਆ ਜਾਂਦੀ ਹੈ ਯਾਰ ਜ਼ਮੀਨ ਦੀ ਕੀਮਤ ਵਾਜ ਜਾਂਦੀ ਹੈ ਪਰ ਸੋਨਾ ਹੋਗੀ ਮੰਦੀ ਉਹ ਜਿਹੜੇ ਜੰਹਰ ਦਾ ਅਮਲੀ ਬਗਾਨਾ ਦੀ ਆਪਣੇ ਸੋਨਾ ਬਣ ਗਈ ਕਹਿਦੇ ਨੇ ਤੋਂ ਸੋਨਾ ਬਣ ਗਈ ਸੋਨਾ ਪੜ ਗਈ ਇਹ ਸੋਨਾ ਮਿੱਟੀ ਵੀ ਮੈਂ ਜਾਂਦਾ ਕਾ ਕਾਪੇਗਾ ਕੱਢ ਰਿਆ ਰੇਟ ਨੂੰ ਮਿੱਟੀਓ ਬਣ ਰਿਹਾ ਮਿੱਟੀਓ ਬਣ ਰਿਹਾ ਰੇਟ ਕਾਹੇ ਆ ਮਿੱਟੀ ਬਣਦਾ ਐਸਾ ਅਮਰਤ ਐਸੀ ਵੀ ਖਾਤੀ ਉਹ ਤਾਂ ਐਸਾ ਅਮਰਤ ਐਸੀ ਆ ਜਿਹੜੇ ਭੋਜਨ ਖਾਦੇ ਆਪਾਂ ਅੰਮ੍ਰਿਤ ਸੱਤਿਆ ਅੰਮ੍ਰਿਤ ਸੱਤਿਆ ਅੰਮ੍ਰਿਤ ਆਂਦੀ ਹੋ ਗੱਲ ਐ ਉਹ ਦੂਏ ਨਾਮਾਂ ਵਰਦੀ ਗੱਲ ਨਹੀਂ ਇੱਥੇ ਹਾਂ ਆਵਾਂ ਵਰਦੀ ਗੱਲ ਨਹੀਂ ਆਉਣੀ ਇੱਥੇ ਬਿਲਕੁਲ ਵੀ ਬੇਠਾ ਵੀ ਨਾ ਲਾਓ ਇਹ ਤਾਂ ਜ਼ੋਨਾ ਆ ਗਿਆ ਕੁਟੀ ਆ ਜੀ ਅੰਮ੍ਰਿਤ ਤੇ ਜਿਹੜੇ ਖਰਚ ਪਰ ਨਹੀਂ ਜਿਹੜੀ ਕੌੜੀ ਦੀ ਜਿਹਨੂੰ ਉਹ ਕਹਿੰਦੇ ਨੇ ਜਿਵੇਂ ਸ਼ਰਾਬ ਹੈ ਜ਼ਹਿਰ ਵਰਗੀ ਕੌੜੀ ਹੈ ਓੜੀ ਜ਼ਹਿਰ ਕਹਿੰਦੇ ਨਾ ਓੜੀ ਬੰਦ ਸੱਤ ਕੌੜੀਆਂ ਚੀਜ਼ਾਂ ਜਿਹੜੀਆਂ ਨੇ ਮਾਰਕ ਰਗਾਰ ਦੀ ਕੌੜੀ ਚੀਜ਼ ਆ ਗਈ ਨਸ਼ੇ ਆ ਗਈਆਂ ਹੋਰ ਜੀ ਹਾਂ ਗਿਆ ਨੇ ਨਾ ਕੌੜੀ ਜੋ ਵੀ ਚੀਜ਼ ਕੌੜੀਆਂ ਨੇ ਜਿਹਨੇ ਇਹਨਾਂ ਨੂੰ ਸ਼ਰੀਰ ਮਿੱਠੇ ਨੂੰ ਕਹਿੰਦੇ ਨੇ ਠੀਕ ਮਿੱਠੇ ਨੂੰ ਕਹਿੰਦੇ ਨੇ ਤੋਂ ਜਿਹੜਾ ਮਿੱਠਾ ਪਾਣ ਨੂੰ ਸੁਆਗ ਲੱਗਦਾ ਹੈ ਅੱਜ ਮੁੱਠੀ ਵਿੱਚ ਬੱਦਾਂ ਇਹਨੂੰ ਅਬਰਤ ਕਹਿੰਦੇ ਨੇ ਸ੍ਰੇਸ਼ ਤੋਂ ਹੁਣ ਤੋਂ ਮਿੱਠਾ ਦੁੱਧ ਦੇ ਵਿੱਚ ਮਿੱਠਾ ਹੈ ਦੁੱਧ ਦੇ ਵਿੱਚ ਮਿੱਠਾ ਦੁੱਧ ਵਰਗਾ ਜਿਹੜਾ ਦੂਆ ਦੁੱਧਾ ਨਾ ਆਪਾਂ ਸੁਆਭੀ ਨਵਿਓ ਜਾਂਦਾ ਹੈ ਉਹ ਜਿਹੜਾ ਟੇਸ ਨਹੀਂ ਹੁੰਦਾ ਜਾਏਗਾ ਮਜ਼ਾ ਨਹੀਂ ਆਉਂਦਾ ਕੋਈ ਮਿੱਠਾ ਹੁੰਦਾ ਸ਼ੂਗਰੋਂ ਕਿਓ ਸ਼ੂਗਰ ਦੀ ਸ਼ਾਦ ਉਹ ਮਠਾ ਕੋੜਾ ਇਹ ਸਭ ਜਿਹੜੀਆਂ ਚੀਜ਼ਾਂ ਨੇ ਨਾ ਉਹ ਫਰਕ ਨਹੀਂ ਪਾਉਂਦੀ ਇਹ ਦੂਜੀ ਮਠਾ ਤੋਂ ਵੀ ਨਹੀਂ ਪੈਸਾ ਅਮਰਤ ਹੈ ਐਸੀ ਬੇਖਾਤੀ ਐਸੀ ਕੋਈ ਖਾਤੀ ਉਹ ਜਿਹੜਾ ਖਟੀਆਂ ਕੀ ਕਰਨ ਉਹ ਉਹ ਨੂੰ ਕਿਉਂਕੇ ਸਾਰੀ ਮਾਇਆ ਹੀ ਹੈ ਉਹਦੇ ਬਾਅਦ ਸਾਰੀ ਉਹ ਮਾਇਆ ਹੈ ਮਾਇਆ ਹੀ ਦੇਖਦੀ ਹੋਈ ਆ ساری ਹਾਂ ਸ਼ਰਾਬ ਕੌੜੀ ਆ ਮੈਨੂੰ ਬੇ ਕਹਿਣ ਨੂੰ ਹੁਣ ਤੇ ਭਾਸ਼ਾ ਹੀ ਬੇਸਤ ਕਰਨ ਲੱਗੇ ਸ਼ਰਾਬ ਦੀ ਤੋਂ ਮੱਧੇ ਮੁਠੇ ਤੋਂ ਗੱਲ ਕੱਟਿਆ ਹੋਇਆ ਹਾਂ ਕੱਢ ਕੇ ਵਾਹ ਤੇ ਜੈਸਾ ਬ੍ਰੱਤ ਐਸੀ ਜਦੋਂ ਸਰਕਾ ਬਣਦਾ ਖੱਟਾ ਹੀ ਹੁੰਦਾ। ਭਾਵੇਂ ਬਣਦਾ ਰਹੇ ਜੋ ਬਣਦੇ ਦੇਖ। ਮੁਠੇ ਜਾ। ਜੁੜੇ ਪਿੱਠਾ ਉਹ ਤਾਂ ਵਰਦਾ ਜਦੋਂ ਖੱਟਾ ਹੋ ਗਿਆ ਸਰਕਾ ਕੋਈ ਗੱਲ ਨਹੀਂ। ਉਹ ਗਿਆਨवान ਹੈ ਉਹਨੂੰ ਅਜਿਹਾ ਨਹੀਂ ਸੁਪ ਜਾਵੇ ਕੋਈ ਨਹੀਂ ਲੋਰੀ ਹਨ। ਪੂਰੇ ਦਾ ਕਰਨ ਆਹੋ। ਗਿਆਨੀ ਹੈ ਹੋਰ ਕੀ ਆ ਸਮਝਦਾ ਸਾਰੀ ਗੱਲ। ਫਿਰ ਲੋਕਾਂ ਗਿਆਨ ਆਦਾ ਕੋ। ਹੋਰ ਜੀ। ਐਸਾ ਮਾਨ ਤੈਸਾ ਉਗਮਾਨ ਤੈਸਾ ਮਾਨ ਤੈਸਾ અપਮਾਨ ਨਹੀਂ ਆਇਆ ਭਗਵਾਨ ਆਇਆ ਹਾਲਾਂਕਿ ਬਾਹ ਦਾ ਉਲਟਾ ਬਵਾਨ ਹੈ અપਵਾਨ ਕਿਉਂ ਨਹੀਂ ਆਇਆ ਭਗਵਾਨ ਤੁਮਾਰ ਉਹਨੂੰ અપਮਾਨ ਤੋਂ ਤਾਂ ਖਤਰਾ ਹੀ ਨਹੀਂ ਹੈ ਭਗਵਾਨ ਤੋਂ ਖਤਰਾ ਭਗਵਾਨ ਤੋਂ ਵੀ ਰੁਕਤ ਜੇ ਕੋਈ ਕਰੂਗਾ ਮੈਂ ਕਿ ਖਤਰਾ ਉਸਾ ਭਾਈ ਨੇ ਦਾਸ ਹੋਣ ਕਿਹਾ ਤੋ ਕੀ ਭਵਾਨ ਕਰ ਦੂ ਕੋਈ ਤੋ ਦਾਸ ਆ ਵੀ ਭਵਾਨ ਕਰ ਦੋ ਹੁਣ ਜੇ ਕੋਈ ਆਪਣੇ ਆਪ ਨੂੰ ਰਾਜਾ ਜੀ ਵਜ਼ੀਰ ਕਹੂ ਚਾਹਾਂ ਭਵਾਨ ਕਰ ਦੂ ਉਹ ਕਹਿੰਦਾ ਹੈ ਕਿ ਚੌਕੀਦਾਰ ਗੁਰੂ ਦਾ ਚੌਕੀਦਾਰ ਆ ਜੀ ਗੁਰੂ ਦਾ ਵਜ਼ੀਰ ਦੀ ਹੈ ਭਵਾਨ ਵਾਸਤੇ ਜਦ ਪਹਿਲੇ ਵਜ਼ੀਰ ਦੀ ਜੇ ਚੌਕੀਦਾਰ ਕਹਿ ਦਵੇ ਆਪਣੇ ਆਪ ਨੂੰ ਮੰਨੇ ਸੇਵਾਦਾਰ ਜੇ ਸਰਦਾਰ ਨਾਖਾਵੇ ਫੇੜੀ ਫੇੜਾ ਅਸਲ ਜੀ ਮਾਨ ਚਾਹੁੰਦਾ ਹੈ ਤਾਂ ਆਪ ਮਾਨ ਤਾਂ ਆਪ ਮਾਨ ਤੋਂ ਕੁਭਰੋਂਗਾ ਜੇ ਬਹੁਤ ਚਾਹੁੰਦਾ ਹੈ ਤਾਂ ਆਪ ਮਾਨ ਤੋਂ ਕੁਭਰੋਂਗਾ ਜੇ ਕੋ ਮਾਨ ਚਾਹਦਾ ਮਾਨ ਚਾਹਦਾ ਹੀ ਤਾਂ ਆਪ ਤੋਂ ਕੁਭਰੋਂਗਾ ਵੀ ਜਿਹੜਾ ਸਲਮਾਨ ਚਾਹਦਾ ਨਹੀਂ ਉਹ ਆਪ ਤੋਂ ਕੁਭਰੋਂਗਾ ਵੀ ਹੋਰ ਕੋਈ ਨਹੀਂ ਇਹਨੂੰ ਸਨਮਾਨ ਦੀ ਬੈਡੀ ਉਹੀ ਕਰੂਗਾ। ਹੋ। ਉਹ ਕਹਦਾ ਇਹਦਾ ਸਨਮਾਨ ਜਿਹੜਾ ਹੈਗਾ ਉੱਤੇ ਜਲਦੀ ਜੱਗ ਜਾਵੇ ਦਿੱਤਾ ਨਾਮ ਪਸਾਰ ਦਿੱਤਾ ਨਾਮ ਪਸਾਰ ਦਿੱਤਾ। ਕਰਦਾ ਲੱਗਦਾ। ਸਨਮਾਨ ਦੇ ਨਾਲ ਭਵਾਨ ਜੁੜਿਆ ਹੋਇਆ ਸਨਮਾਨ ਬੰਦੀ ਸਾਰੇ ਭਵਾਨ ਚ ਬੱਸ ਜਾਂਦਾ। ਬੱਸ ਜਾਂਦਾ। ਮਿੱਠਾ ਮੂਹ ਦੇ ਵਿੱਚ ਮਿੱਠਾ ਹਲਦੇ ਦੇ ਥੱਲੇ ਹੁਤੀ ਸਾਰੇ ਖੱਟਾ ਬਣ ਜਾਂਦਾ। ਤੇ ਖੱਟਾ ਬਣ ਜਾਂਦਾ। ਤੂਤ ਮਠਾ ਜ਼ਰੂਰ ਹੈ ਫਲਕ ਦੇ ਥੱਲੇ ਗਿਆ ਜੇ ਜਦੇ ਉਲਟੀ ਆ ਜਾਏ ਜਦੇ ਫੜ ਜਾਂਦਾ ਖੱਟਾ ਹੋ ਜਾਣਾ ਅਗਰ ਉਹ ਖਟਾ ਜਾਂ ਮੁਰਦਾ ਜਾਂ ਖਟਾ ਲੱਗਦਾ ਆਪ ਨੂੰ ਜਾਂਦਾ ਤਾਂ ਮਿੱਠਾ ਲੱਗਦਾ ਜਾਂ ਅੰਦਰੋਂ ਜਾਂ ਬਾਹਰੋਂ ਦਾ ਮਿੱਠਾ ਹੈ ਜਾਂ ਬਾਹਰੋਂ ਆਉਂਦਾ ਦਾ ਫਟਾ ਜਾਗਾੰਦ ਨੂੰ ਆਉਂਦਾ ਮਾਂ ਦਾ ਮਿੱਠਾ ਲੱਗਦਾ ਜਾਂ ਬਾਦ ਨੂੰ ਆਉਂਦਾ ਤਾਂ ਹੰਕਾਰ ਬਣ ਗਿਆ ਉਹਨਾਂ ਵਰਗਾ ਜਾਂ ਦੁਆ ਬੋਲੂਗਾ ਸਾਨੂੰ ਇੱਜ਼ਤ ਨਾਲ ਸਨਮਾਨ ਦੇ ਕੇ ਤਾਂ ਖੁਸ਼ ਹੋਵਾਂਗੇ ਜਾਂ ਅਸੀਂ ਨੁਕਾਲ ਬੋਲਾਂਗੇ ਤਾਂ ਉਹ ਲਾਜ ਹੋਣਗੇ ਸਨਮਾਨ ਲੈਣ ਵਾਲਾ ਸਨਮਾਨ ਦਿੰਦਾ ਨੀਂ ਰਾਜਾ ਜੇ ਤੂੰ ਸਾਰੇ ਸਨਮਾਨ ਦਿੰਦਾ ਰਾਜਾ ਤੁਸੀਂ ਥੋੜੀ ਦਿੰਦਾ ਦਾ ਹੁਰਬਿਡੇ ਹੀ ਕਰਦਾ ਜੀ ਦੇਣ ਲੈਣ ਵਾਲਾ ਦੇ ਨਹੀਂ ਸਕਦਾ ਜੋ ਲੇਵੇ ਸੋ ਦੇਵੇ ਦਵਾਹੀ ਜੋ ਲੇਵੇ ਸੋ ਦੇਵੇ ਨਹੀਂ ਜੋ ਸਨਮਾਨ ਲੈਂਦਾ ਤੇ ਕਿਸ ਤੋਂ ਉਹਦਾ ਲੈਣਾ ਇਹ ਕੀ ਆ ਹੈ ਦੇਣ ਤਾਂ ਜੀ ਆਈ ਦਿਓ ਜੋ ਸਨਮਾਨ ਦਿੰਦਾ ਉਹ ਲੱਜਦਾ ਨਹੀਂ ਇਹਦਾ ਉਲਟਾ ਜੋ ਦੇਵੇ ਸੋ ਲੇਵੇ ਨਹੀਂ ਪਰਮੇਸ਼ਰ ਸਾਦੂ ਸਾਰਿਆਂ ਦਾਤਾ ਦਿੰਦਾ ਕੁਝ ਵੀ ਨਹੀਂ ਲੈਂਦਾ ਸਾ ਤੋਂ ਦੇਖ ਕੇ ਦਿਖਾਓ ਕੋਈ ਦੋ ਇੱਜਾਤੀ ਹੋ ਜੋ ਫਾਰਮੂਲਾ ਇਹ ਸਾਰਿਆਂ ਦੇ ਲਈ ਜਾਣਾ ਪਰਮੇਸ਼ਰ ਦਾ ਵੀ ਲੱਗ ਜਾਣਾ ਜੋ ਲੇਵੇ ਸੋ ਦੇਵੇ ਨਹੀਂ ਜੋ ਲੇਵੇ ਸੋ ਦੇਵੇ ਨਹੀਂ ਪਰ ਜੋ ਦੇਵੇ ਸੋ ਲੇਵੇ ਨਹੀਂ ਦੇਣ ਵਾਲਾ ਵੀ ਜੇ ਲੇਵਨ ਆਈ ਵਾਲੀ ਗੱਲ ਕਰੇ ਫਿਰ ਪਰਮੇਸ਼ਰ برداشتਾ ਮਾਏ ਅੱਗੇ ਆਉਂਦੀ ਇਹ ਗੱਲ ਹੈ ਹੁਣ ਸਤੋ ਹੀ ਚਲੂ ਹੋਣੀ ਆ ਗੱਲ ਪੂਜਾ ਤੋਂ ਕਈ ਕੋਟ ਪਏ ਪੁਜਾਰੀ ਅਗਲੀ ਇਹ ਨੁਕਤੇ ਤੋਂ ਗੱਲ ਚੱਕਣੀ ਆ ਹੁਣ ਇਹ ਗੱਲ ਗਾਂ ਦੀ ਇਸਪਤਰੀ ਕਿਉਂ ਚੱਕੀਆ ਕਿੱਥੋਂ ਚੱਕੀਆ ਕੀ ਇੱਥੇ ਸੀ ਕੀ ਹੈਗੀ ਆ ਸੀ ਇਹ ਬੋਲ ਹੋਰ ਕਰੂ ਆਸਬਦੀ ਦੇ ਬਾਅਦ ਆਪ ਅਸਬਦੀ ਕਿਉਂ ਨਹੀਂ ਚੁੱਕਿਆ ਕਿਤੋਂ ਸ਼ਾਰਟ ਕੀਤੀ ਕਿੱਥੇ ਖਤਮ ਕੀਤੀ 24 ਬਣਦੀਆਂ 25 ਦੀ ਸੀ ਬੰਸਰ ਦੀਆਂ ਇਹ 18 ਦਿਨ ਦੀ ਅਫਸਰ ਗੱਲ ਕੀ ਹੈ ਇਹ ਤਾਂ ਸਾਰੇ ਜਿਹੇ ਪਿਆ ਸਾਰੇ ਪਿਆ ਇਹ ਘਟਨ ਵਾਲੀ ਤਾਂ ਰੋ ਰਾਇਆ ਪਾ ਤੋੜਿਆ ਤੋੜਿਆ ਆਉ ਤਾਂ ਰੋਣਾ ਪਾਇਆ ਚੁੱਪ ਚੁੱਪ ਕਰਾਇਆ ਨਹੀਂ ਨਾ ਜਦੋਂ ਰੋਣਾ ਪੈ ਨਾ ਬੈ ਚੁੱਪੇ ਕਰਾਉਣਾ ਫਿਰ ਸੁਣ ਨਾਲੇ ਚੁੱਪ ਕਰਾਈ ਦੇਉਂਦੇ ਨੇ ਵੀ ਸੁਣ ਲੋ ਟੇਕ ਕੇ ਬਹਿ ਕੇ ਔਲੇ ਹੋ ਰੋਲਾ ਬੰਦ ਕਰਦੇ ਨੇ ਵਿਚੋ ਔਰੇ ਤਰ੍ਹਾਂ ਦਾ ਆ ਕਰਦੇ ਨੇ ਕਹਾ ਗੁਰਬਾਣੀ ਦੇ ਉਹਨਾਂ ਨੂੰ ਉਹੀ ਬੁਰਾ ਭਲਾ ਕਹ ਕੇ ਦਬਕੇ-ਸ਼ਬਕੇ ਜਿਵੇਂ ਗੁਰਬਾਣੀ ਦੇ ਵਿੱਚ ਪਹਿਲਾਂ ਵੀ ਪਹਿਲਾਂ ਵੀ ਉਹਨਾਂ ਨੂੰ ਮਾਰੇ ਹੋਏ ਨੇ ਪਹਿਲਾਂ ਵੀ ਤਾਂ ਹਾਰੇ ਰੋਣਾ ਬੰਦ ਰਹਿਣ ਨੇ ਨੇ ਏਵੇਂ ਐਸਾ ਧੰਗ ਰੌਲਾ ਪਾਉਂਦੇ ਰਹਿੰਦੇ ਨੇ ਇਹਨਾਂ ਨੂੰ ਚੁੱਪ ਵੀ ਕਰਾਉਣੀ ਹੈ ਵਰਗਾਂ ਚੁੱਪ ਕਰੇ ਬਿਨਾਂ ਦੂਜੇ ਦੀ ਦੂਜੇ ਦੀ ਸੁਣਨਾ ਤੇ ਹੋ ਭਈ ਜੇ ਕੋਈ ਸਵਾਜ ਰੌਲਾ ਪਾਵੇ ਉਹ ਨੂੰ ਤਾਂ ਸੁਣਨਾ ਗੁਰਦੁਆਰੇ ਅੰਦਰ ਸੌਣ ਜਾਂਦੇ ਨੇ ਉਹ ਇਹ ਰੌਲਾ ਪਾਉਂਦੇ ਨੇ ਹਾਂਜੀ ਤੈਸਾ ਰੰਗ ਤੈਸਾ ਰਹਾ ਜਾਣਾ ਰੰਗ ਤੇ ਤੈਸਾ ਰਹਾ ਜਾਣਾ ਉਹ ਲੋਕ ਰਾਜ ਪਰ ਜੀਵਨ ਮੁਕਤ ਹੋਊ ਕਹਾਵੇ ਵਾਲੇ ਆ ਜਿੱਦੀ ਗੱਲ ਚੱਲਦੀ ਐ ਪਾਣਾ ਪੰਚਨ ਵਾਲੀ ਗੱਲ ਚੱਲਦੀ ਐ ਉਹਦੀ ਗੱਲ ਆ ਰੱਬ ਉਹਦੀ ਗੱਲ ਚੱਲਦੀ ਐ ਗੱਲ ਕੀ ਦੀ ਗੱਲਦੀ ਉਹ ਕਹਿੰਦਾ ਜੇ ਰਾਜਾ ਜੇ ਕੰਮੀ ਬੈਜੋ ਕੋਈ ਕੋਈ ਕੁਰਸੀ ਆ ਰਾਂਜਾ ਜੇ ਉਹ ਬੈਜੇ ਜੇ ਰਾਯਾ ਆਇਆ ਤਾਂ ਆ ਗਿਆ ਠੀਕ ਐ ਜਿਨਾ ਉਹਦਾ ਖਤਰੋ ਸਪੈਸ਼ਲ ਕਰਦੀ ਲੋੜੀ ਸਪੈਸ਼ਲ ਤਾਂ ਸਾਡੇ ਬਾਦ ਦਾ ਰਾਜਾ ਹੋਆ ਜਿਹੜਾ ਅਗਰ ਮੱਦਾ ਤਾਂ ਜਿੰਨਾ ਜ਼ਿਆਦਾ ਤਾਂ ਨਹੀਂ ਵੱਡਾ ਰਾਜਾ ਜਿੰਨਾ ਜ਼ਿਆਦਾ ਬਾਹਾਂ ਵਾਸਤੇ ਉਹ ਤੋਂ ਵੱਡਾ ਹੈ ਇਨਾਕ ਤਾਂ ਫਰਕ ਪੋਗੋਈ ਜੂ ਕਿਥੇ ਵੀ ਉਹ ਜਿਵੇਂ ਬੈਠਾ ਦਰਗਾਹ ਜੀ ਵਿੱਚ ਬੈਠਾ ਇਹਦਾ ਕੋਰ ਮਾਤੇ ਜਿਆਦਾ ਨੇੜੇ ਹੈ ਅਗਰ ਬੜੀ ਆਈ ਤਾਂ ਉਹਨੂੰ ਬੜੀ ਜਿਹਾ ਪੂਰਾ ਦਾਸ ਹੋ ਚ ਫਰਕ ਹੈ ਉਹ ਹੋਊਗੀ ਉਹ ਮੁੰਡੀ ਕਿਰਪਾ ਘਟੇ ਹੋਉਗੇ ਅਸਲ ਤੇ ਆਪ ਜਾਣਾ ਕਿਰਪਾ ਦੇ ਡੇੜੇ ਰੂਹ ਅਸੀਂ ਹੋ ਕਿਰਪਾ ਦੇ ਪਰਿਆਂ ਕਿਰਪਾ ਤਾਂ ਉੱਥੇ ਹੀ ਹੈ ਸਲਾਈਡ ਆ ਕਿਥੋਂ ਖੜੀ ਆ ਅਸੀਂ ਉਹਦੇ ਨੇੜੇ ਨੂੰ ਜਾ ਕੇ ਪੜ ਲਈਏ ਜੇ ਆਪਣੀ ਕਿਤਾਬ ਕਿ ਜਗਾਦੀ ਦੀ ਇਹ ਦੂਰੋਂ ਤਾਂ ਸਾਡਾ ਨੇੜੇ ਜਾ ਕੇ ਪੜ ਲਓ ਜੇ ਬਰੀਕ ਅੱਖਾਂ ਨੇੜੇ ਬੜ ਲਓ ਜਾ ਕੇ ਜਿਹੜਾ ਜਾਦਾ ਨੇੜੇ ਪੜਦਾ ਉਹ ਵਧੀਆ ਦੀਦਾ ਉਹ ਠੀਕ ਪੜਦਾ ਜਿਹੜਾ ਦੂਰੋਂ ਪੜਦਾ ਉਹ ਤੇ ਪਰ ਖੜੀ ਆ ਉਹਦੀ ਸਰਫਾ ਉਹ ਕਿਹਨੇ ਜਿਹੜਾ ਨੇੜੇ ਆ ਉਹ ਕਿਹਨੇ ਨਹੀਂ ਕਹਿੰਦਾ ਲੈਟ ਦੇ ਜਿਹੜੇ ਹੋ ਕੇ ਉਹ ਤਾਂ ਕਹੇਰੀ ਆ ਜਿਹੜਾ ਦੂਰ ਖੜਾ ਹੋ ਤੇ ਥੋੜੀ ਆ ਉਹ ਕਰਮ ਘਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਹਿਦਾ ਦਿੰਦਾ ਹੋਰ ਕੀ ਕਹਿੰਦੇ ਤੁਸੀਂ ਆਪ ਨੇੜੇ ਜਾਣਾ ਉਹ ਵੀ ਦੂਰ ਨੇੜੇ ਜਿਹਾ ਤੇ ਵੀ ਹੈ ਤੁਸੀਂ ਆਪਣੀ ਕੋਸ਼ਿਸ਼ ਨਾ ਕਰਮੀ ਆਪੋ ਆਪਣੇ ਕੇ ਨੇੜੇ ਕੇ ਤੂੰ ਉਹ ਤਾਂ ਦੂਰ ਨੇੜੇ ਕੇ ਤੂੰ ਇੱਕੋ ਥਾਂ ਖੜਾ ਦੂਰ ਨੇੜੇ ਅਸੀਂ ਅੱਜ ਆਪਣਾ ਮਾਨ ਕਰਕੇ ਦੂਰ ਨਾ ਦੇ। ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਖ। ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਖ। ਜੁਗਤ ਕੀ ਹੁੰਦੇ? ਜੋ ਪਰਮੈਸ਼ਰ ਵਰਤਾ ਰਹੇ। ਉਹ ਹੀ ਦੀ ਵਿਧੀ ਹੈ। ਜੋ ਜੀਵਨ ਜੋ ਤਾਹ ਸਾ ਜੀਵਨ ਦੀ ਜੋਤੀ ਆ ਉਹ ਜੋ ਵਰਤਾ ਰਹੇ ਭਣ। ਉਹਨਾਂ ਨੂੰ ਜੀਵਨ ਮੁਕਤ ਕਰਨਾ ਆ ਜਿਹੜੀ ਕੋਦਲਤਾ ਹੈ ਉਹੀ ਦਾ ਮੁਕਰਾ ਰਹੇ ਦੇਖ ਰਹੀ ਆ ਉਹ ਅਸਲੀ ਜੀਵਨ ਮੁਕਤ ਕਰਨ ਵਾਸਤੇ ਕੋਦਲਤ ਬਸ ਰਹੀ ਆ ਪਰ ਅਸੀਂ ਨੂੰ ਹੋਰ ਸੱਜਣ ਚਲਾ ਜਾਂਦੀ ਹੈ ਅਸੀਂ ਆਪਣੇ ਆਪਣੇ ਅਸਾਬਨਾਂ ਨੂੰ ਲੈ ਰਹੇ ਹਾਂ ਕੋਦਲਤ ਅਸੀਂ ਆਪਣੇ ਆਪਣੇ ਆਪਣੇ ਆਪਣੇ ਪੰਜ ਸਾਲ ਲੈ ਰਹੇ ਹਾਂ ਗੁਰਕੇ ਪੜ੍ਹਨ ਲਈ ਆਪਣੀ ਆਪਣੀ ਇੱਛਾ ਅਨਸਾਰ ਉਹ ਲੈ ਰਹੇ ਹਾਂ ਪਾਣ ਨੂੰ ਸਾਡੇ 14 ਨ ਟਕਰੌਦੀ ਹੈ ਜੇ ਛੱਬਾ ਕਾਹਦੀ ਜੀਵਨ ਜੁਗਤ ਅਸਲ ਕਿ ਇਹ ਹੀ ਜੋ ਤਾਜੀ ਜੀਵਨ ਜੁਗਤ ਜੋ ਪਾਣ ਹੈ ਤਾਂ ਜੀਵਨ ਜੁਗਤ ਹੈ ਉਪਰ ਅਜੀਬ ਆ ਜੀਵਨ ਹੈ ਸਾਜੀ ਜੀਵਨ ਜੁਗਤ ਹੈ ਸੱਜੀ ਜੀਵਨ ਜੁਗਤ ਸਾਰੇ ਜੀਵਨ ਦੀ ਮੁਕਤੀ ਕੀ ਹੈ ਇਸਕੀ ਹੈ ਭਾਂਜ ਰਹਿਣਾ ਪਾਣਾ ਮਨ ਨੂੰ ਮਠਾ ਕਰਦੇ ਕੌੜਾ ਜੰਮ ਕਰਦਾ ਦੁਨੀਆਂ ਟੈਸਟ ਕਰਨ ਵਾਸਤੇ ਕੌੜਾ ਨਾ ਹੋਵੇ ਤੇ ਜਿ ਵਿਖਣਾ ਨਹੀਂ ਪਾਵੇ ਰੰਗ ਵਿੱਚ ਪਤਾ ਲੱਗ ਜੇ ਹੋ ਜਾਈ ਮਨ ਦਾ ਮਜ਼ੋਰ ਗਈ ਕਦੇ ਮੁਸਬਾਤ ਨਾ ਖਰੇ ਬੈਠੋ ਆਣਾ ਜੇ ਦੋ ਵੇਪਾਈ ਤੇ ਆਇਆ ਕਰੋ ਰੰਦ ਠੀਕ ਹੈ ਕੋਈ ਗਿਆ ਉਹ ਸਭ ਪਹਿਲਾਂ ਨਹੀਂ ਆ ਗਿਆ ਅੱਖਾਂ ਇਹ ਮਿੱਟੋ ਦੇ ਦਵਾਈ ਦੇ ਚੰਗਾ ਵੀ ਉਹ ਜਦੋਂ ਕੀ ਫਰਕ ਆ ਸਾਨੀ ਜੋ ਵਰਤਾਏ ਸਾਈਂ ਜੁਗਤ ਨਾਲ ਕੋ ਕੋ ਕਹੀਏ ਜੀ ਬਣੋ ਜੋ ਵਰਤਾਏ ਜੋ ਵਰਤਵੇ ਹੈ ਭਾਣਾ ਜੋ ਵਰਤੇ ਸੋ ਤੇਰਾ ਭਾਣਾ ਹੋਰ ਵਰਤਾਏ ਕੀ ਬਤਾਏ ਸੋ ਉਹ ਦੇਖਰਾ ਪ੍ਰਿਯਾ ਵਰਤਾਏ ਕਿ ਬਤਾਏ ਹੋਰ ਕੀ ਬਤਾਏ ਜੋ ਕਰ ਰਿਹਾ ਵਰਤਾ ਰਿਹਾ ਸਮਝੋ ਦੇ ਰਿਹਾ ਉਹ ਵੀ ਬਤਾਇ ਰਿਹਾ ਦੁੱਖ ਦੇ ਰਿਹਾ ਸੁੱਖ ਦੇ ਰਿਹਾ ਵੀ ਤਾਂ ਬਤਾਇ ਰਿਹਾ ਕਾਲਜ ਕੀ ਬਤਾ ਰਿਹਾ ਸੋ ਘਰ ਤੋਂ ਖਲੀ ਬਾਰਸ਼ ਕਰਦੇ ਇਹ ਦੋ ਘਰ ਤੋਂ ਠੀਕ ਹੈ ਕੋਈ ਜਾ ਲੱਗਦਾ ਵੇ ਠੀਕ ਮੀਟਰ ਲੱਗ ਗਿਆ ਉੱਤੇ ਬੜੇ ਦਾ ਬੜਾ ਸੰਤ ਪਛਾਣਿਆ ਜਾਊਗਾ ਬੜੇ ਦਾ ਹਰ ਇੱਕ ਕਾਜ਼ੀ ਦੀ ਪਛਾਣ ਹੈ ਬੜੇ ਦੇ ਨਾਲੇ ਕਦਰ ਪਹਿਲਵਾਰੀ ਲੱਗ ਗਈ